सारंग की वार महला चौथा राए महमे हसने की तुनी एक ओंकार गुर प्रसाद शलोक महला दूजा, गुरु कुंजी पाहु निवल मन कोठा तन छत् नानक गुर बिन मन का ताक ना उगड़ै अवरना ना कुंजी हाथ ਨੰਨਾ ਨਾ 250 ਦਾ 12 ਨੂੰ ਕੱਟੀ ਬਣਾ ਲਿਆ ਇੱਥੇ ਕੋ ਹੋਰੇ ਲਿਖਿਆ ਹੋਇਆ ਗੁਰਪੁੰਜੀ ਗਿਆਨ ਦੀ ਕੁੱਜੀ ਹੈ ਗਿਆਨ ਕੁੱਜੀ ਪੈਰਾਂ ਨੂੰ ਨਿਓੜ ਲੱਗਿਆ ਹੋਇਆ ਅਟਕੜੀ ਹੁੰਦੀ ਆ ਜਿਵੇਂ ਨਿਓੜ ਹੁੰਦਾ ਜਾਨਵਰਾਂ ਦੇ ਪੈਰਾਂ ਨੂੰ ਲੱਗਿਆ ਹੁੰਦਾ ਜਿਵੇਂ ਹਟਕੜੀ ਹੁੰਦੀ ਆ ਹੱਥ ਨੂੰ ਲੱਗੀ ਦੋਹਾਂ ਨੂੰ ਕੱਠੀ ਐ ਪੈਰਾਂ ਨੂੰ ਨਿਓੜ ਲੱਗਿਆ ਹੁੰਦਾ ਉਠਾ ਲੈਂਦੇ ਘੋੜਿਆਂ ਦੇ ਆਹ ਉਹ ਨੇਵਲ ਪੈਰਾਂ ਨੂੰ ਡੇਵਣ ਲੱਗਿਆ ਹੋਇਆ ਭਜ ਨੀ ਸਕਦਾ ਮਨ ਕੋਠਾ ਤਾਂ ਛੱਤ ਉਹਨ ਕੋਠਾ ਗੁਰਬੁਧਰ ਆ ਤਾਂ ਜਿਹੜਾ ਵਾਹਲ ਆ ਛੱਤੀ ਆ ਨਾ ਉੱਤੇ ਛੱਤਿਆ ਹੋਇਆ ਛਾਤੀ ਦੇ ਅੰਦਰ ਉਹ ਛੱਤ ਛਾਤੀ ਦੀ ਪਾਈ ਹੋਈ ਮਨ ਕੋਠਾ ਤਾਂ ਛੱਤ ਛੱਤ ਦਾ ਭਾਵ ਛਾਤੀ ਐ ਕਿ ਜਿਹੜੀ ਉੱਪਰ ਛੱਤ ਪਾਈ ਹੁੰਦੀ ਆ ਉਹ ਛੱਤ ਪਾਈ ਆ ਪੱਥਰੀਆਂ ਦੀ ਅੱਛਾ ਜੀ ਪੱਥਰੀਆਂ ਦੀ ਛੱਤ ਪਾਈ ਆ ਹਾਰਡ ਦੇ ਉੱਤੇ ਦੇ ਉੱਤੇ ਪਟਾਖਾਂ ਦੁਆਰਾ ਉੱਤਰ ਪੱਥਰ ਖੋਇਦਲ ਹਰ ਦੇ ਉੱਤੇ ਛੱਤ ਪਾਈ ਆ ਤਾਂ ਕਿ ਬੋਝ ਨਾ ਪੈ ਜਾ ਠੀਕ ਹੈ ਜੀ ਜਾਣਕ ਕੁਰਬੈਨ ਬਣ ਕਾ ਤਾਂ ਅਵਲ ਸੁੱਜੀ ਤੇ ਬਿਨਾ ਮੰਨਤਾ ਜਨ ਨਾਲੀ ਘੁਲਣਾ ਤਾਂ ਉਗੜਾ ਆਵਰ ਨਾਲ ਕੋਈ ਹੱਥ ਹੋਰ ਕਿਸੇ ਦੇ ਹੱਥ ਕੋਈ ਦੀ ਗਿਆਨ ਦੀ ਕੋਈ ਚੱਲ ਨਹੀਂ ਹੱਥ ਹੈ ਗਿਆਨ ਦੀ ਕੁੰਜੀ ਤਾਨੂੰ ਲੱਭਣੀ ਪਾਣੀ ਗਿਆਨ ਪ੍ਰਾਪਤ ਕਰਨਾ ਪੈਣਾ ਤੇ ਆਪਣਾ ਦਰਵਾਜ਼ਾ ਖੋਲਣਾ ਫਿਰ ਆਜ਼ਾਦ ਹੋ ਜੇ ਮਹੱਲਾ ਪਹਿਲਾ ਨਾ ਭੀਜੈ ਰਾਗੀ ਨਾਦੀ 베ਦੀ ਨਾ ਭੀਜੈ ਸੁਰ ती ज्ञानी योगी ना पीजे सोगी कीते रोजी ना पीजे रूपी माली रंगी तर बोले तरा, तरा दे बंधु प वास्ते गोन पे छजेवे की है ना पीटे रागी रागा नारली पजदा उरी क देवी ਝੂਠ ਬੋਲਨੇ ਕਹਨੇ ਮਨ ਪੱਤਰ ਫਗੜ ਜਾਂਦਾ ਹੈ ਬੜੇ ਬੜੇ ਝੂਠ ਬੋਲਦੇ ਨੇ ਧਰਮ ਦੇ ਵਿੱਚ ਆਪੀ ਵਿਦਿਆਰਗਿ ਨਾਤੀ ਬੇਟੀ ਬੇਦ ਪੜੇ ਤੇ ਦੀ ਪੇਂਦਾ ਨਾਲ ਜਿਹੜਾ ਸੁਣਦੇ ਨੇ ਜੋਗੀ ਉਹਦੇ ਨਾਲ ਦੀ ਪੇਂਦਾ ਬੋਲ ਨਾ ਭੀਜੇ ਸੁਰਤੀ ਗਿਆਨੀ ਜੋਗੀ ਆ ਜਿਹੜੇ ਸੁਰਤ ਟਕਾਲਦੇ ਨੇ ਗਿਆਨੀ ਜੋਗ ਮਤਾਲੇ ਉਹਨਾਂ ਦਾ ਵੀ ਮੰਦੀ ਪੱਜਾ ਕਿਸੇ ਦਾ ਅਜ ਤੱਕ ਅੱਪੀਚ ਥੋਗੀ ਕੀਤੇ ਰੋਜੀ ਥੋ ਕੀਤੇ ਤੇ ਹੋਸਦੀਆਂ ਪਰ ਉਹ ਜਿਹੜੇ ਸਰੇਵੜੇ ਨਹੀਂ ਜੋੜ ਕੇ ਰਹਿੰਦੇ ਨੇ ਉਹ ਸੋ ਕਰੇ ਤੇ ਬਲੀ ਰੋਜ਼ ਕਰਦੇ ਰਹੋ ਚਾਹੇ ਤੁਸੀਂ ਸਾਨੂੰ ਚੱਕ ਲੈ ਤੁਸ ਜੇ ਸਾਨੂੰ ਗਿਆਨ ਦੀ ਦੇਣਾ ਅਸੀਂ ਬਹੁਤ ਦੁਖੀ ਆ ਇੱਥੇ ਨਾ ਪੀਚੇ ਰੂਪੀ ਬਾਣੀ ਲੱਗੀ ਨਰੂਪਾ ਪੂਰਤੀ ਰੂਪਾ ਰੂਪ ਨਾਲੇ ਅਰੂਪ ਦੇ ਦਰਸ਼ਨ ਨਾਲ ਬਾਲਾ ਫੇਰਨ ਨਾਲ ਨਹੀਂ ਭਜਦਾ ਅਜ ਕਿ ਗਿਆ ਬਚਿਆ ਦਾ ਕੁਝ ਵੀ ਧਰਮ ਦਾ ਕੋਈ ਵੀ ਨਹੀਂ ਵਜਿਆ ਤੇ ਫਿਰ ਜਦ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਗੱਲ ਪਹਿਣੀ ਸੀ ਇਹਨਾਂ ਨੇ ਗੁਰੂ ਘਰ ਦਾ ਜਦ ਲੈਣ ਦੇ ਹਟਦੇ ਹੀ ਦੀ ਤੇ ਫਿਰ ਗੱਲ ਤਾਂ ਪਹਿਣ ਗਈ ਉਹ ਹਾਂ ਨਾ ਧੀਜੈ ਤੀਰਥੀ ਭਵੀਏ ਨੰਗੀ ना ਭੀਜੈ दाती ਕੀਤੇ ਪੁੰਨੀ ਨਾ ਭੀਜੈ ਬਾਹਰੀ ਬੈਠਿਆ ਸੁੰਨੀ ਨਾ ਭੀਜੈ ਕੋਚਾਰਕ ਹੋ ਰਹਿਗੇ ਉਹ ਵੀ ਗਣਤੇ ਨਾ ਭੀਜੈ ਤੀਰਥ ਭਵੀਐ ਜਿੱ ਕੀ ਲੱਗੇ ਪੈਰੀ ਤੀਰਥਾਂ ਤੇ ਫਿਰਦੇ ਹੋ ਇਹਦੇ ਨਾਲ ਮੰਦੀ ਭੇਜਣਾ ਕੋਈ ਜਿਹੜੀ ਮਾਤੀ ਤਸੱਲੀ ਨਹੀਂ ਹੋਈ ਤਾਂ ਪਿੱਛੇ ਬਾਹਰ ਬੈਠਿਆ ਸੱਦੀ ਉਹ ਬਾਹਰ ਜਾ ਕੇ ਜਗਨਾ ਚ ਸੋਧ ਸਦਾਨ ਦੇ ਵਿੱਚ ਬੈ ਗਏ ਜੋਗੀ ਬਣ ਕੇ ਪੜੀਆਂ ਚ ਬੈ ਕੋਈ ਕਰੇ ਉਹ ਮਨ ਨਹੀਂ ਭਜਣਾ ਇਹਨਾਂ ਕਬੂਲਦਾ ਤੇ ਜਨਾ ਕਿਵੇਂ ਉਹ ਗਾਹਾਂ ਦੱਸਣਗੇ ਦਸਮ ਗ੍ਰੰਥ ਜਿਹੜੀ ਤੁਕ ਹੈ ਉਹ ਕਹਿੰਦੇ ਆ ਭਾਂਤ ਭਾਂਤ ਕੇ ਤੀਰਥ ਨਾਨਾ ਔਰ ਸ਼ੱਕ ਲੰਪੈਂਦਾ ਕਿ ਨੌਵੇਂ ਪਾਸ਼ਾ ਤੀਰਥ ਨਹਾਉਂਦੇ ਸੀ ਇਹਦਾ ਕੀ ਭਾਵ ਹੈ ਜੀ ਪੁਰਬ ਤਪੀ ਪੁਰਬ ਕੀ ਉਹ ਪਿਆਨਾ ਭਾਂਪਾਂ ਭਾਂਪ ਕੇ ਤੀਰਥ ਨਹਾਉਂਦੇ ਕਬਤੇ ਜਾਦ ਤਰੇੜੀ ਭੈ ਕੋ ਨੇ ਅਸੀਂ ਮੁਕਤੀ ਲੜ ਕੇ ਤੇ ਉਹ ਤਾਂ ਦੇਣ ਗਏ ਤੇ ਰੂਪ ਤੀਰ ਸੰਤ ਆਹੀ ਗੱਲ ਕਰਨ ਗਏ ਤੇ ਕਹਿ ਰਹੇ ਨੇ ਮਦੀ ਭੱਜਿਆ ਕਿਸੇ ਦਾ ਪਿੱਛਾ ਜਾਂਦਾ ਦੱਸੋ ਇਹ ਹੀ ਗੱਲ ਉਹ ਜਿਹੜੀ ਕਹਿ ਰਹੇ ਨੇ ਤੀਰਥ ਤੇ ਜਾ ਕੇ ਸਹੀ ਹੈ ਗੱਲ ਕਿਉਂਕਿ ਤੀਰਥਾਂ ਤੇ ਇਕੱਠ ਕਾਫੀ ਹੋ ਜਾਂਦਾ ਫਿਰ ਸੰਗਤ ਨਾਲ ਸੰਪਰਕ ਕਰਨਾ ਸੌਖਾ ਹੋ ਗਿਆ ਇਸ ਤਰ੍ਹਾਂ ਗੁਰਨਾਨਕ ਸਾਹਿਬ ਵੀ ਗਏ ਆ ਜਿੱਥੇ ਉਹਨਾਂ ਨੇ ਆਪਣੀ ਗੱਲ ਕੀਤੀ ਹੈ ਵੀ ਕੋਈ ਮੇਲਾ ਜਾਂ ਤੀਰਥ ਲੱਗਿਆ ਹੋਵੇ ਉੱਥੇ ਗੱਲ ਕਰਨੀ ਸੌਖੀ ਹੈ ਇਕੱਲੇ-ਦਲੇ ਨੂੰ ਕਿੱਥੇ ਲੱਭਦੇ ਫਿਰਦੇ ਠੀਕ ਹੈ ਪਰ ਉਹਨਾਂ ਨੇ ਤੀਰਥਾਂ ਤੇ ਜਾ ਕੇ ਮੁਕਤੀ ਨਹੀਂ ਲਈ ਚਾਹੇ ਜਿਹੜੇ ਤੀਰਥ ਨਾਨਾ ਸ਼ੰਕਾ ਖੜੀ ਕਰਦੇ ਆ ਬਹੁਤ ਲੋਕ ਕਿ 9ਵੇਂ ਪਾਤਸ਼ਾਹ ਤੀਰਥਾਂ ਤੇ ਆਪ ਨਾਏ ਆ 10ਵੇਂ ਪਾਤਸ਼ਾਹ ਦੇ ਵਾਸਤੇ ਵਰਦਾਨ ਲੈਣ ਨੂੰ ਉੱਥੇ ਤਾਂ ਲਿਖਿਆ ਨਹੀਂ ਹੋਇਆ ਗੱਲ ਇਹ ਥੋੜੀ ਲਿਖਿਆ ਆ ਵੀ ਵਾਸਤੇ ਗਏ ਨੇ ਯਾਦ ਰੂ ਕਿਸੇ ਨੇ ਕਿਹਾ ਸੀ ਤੁਸੀਂ ਜਾਓ ਤਾਂ ਪੁੱਤਰ ਦੀ ਪ੍ਰਾਪਤੀ ਹੋਊਗਾ ਕਹਿੰਦਾ ਲੈ ਦੀ ਕਿਤੇ ਜਿੱਗੜ ਨਹੀਂ ਇਹ ਗੱਲ ਅੱਛਾ ਇਹ ਫਿਰ ਆਪਣੇ ਕੋਲੋਂ ਜੋੜ ਲੈਣੇ ਆ ਵੀ ਸ਼ਾਇਦ ਪੂਰਬ ਚਲੇਗਾ ਲੋਕ ਨਾ ਤੇ ਆਪਨਾ ਉੜਲਾ ਦੇ ਵਿੱਚ ਨਾ ਹੋਂਦਾ ਤਾਂ ਪਿੰਡਾ ਹੀ ਆ ਡਾਉਣ ਦਾ ਕੋਈ ਪਾਪ ਨੀ ਹੈ ਉਸ ਨਾਲੋਂ ਦਾ ਫਲ ਹੀ ਮੰਨਦੇ ਸਵਾਲ ਇਹ ਕਿ ਬਹਾਲੇ ਬਿਠਾ ਤਾਂ ਉਹਦਾ ਫਲ ਮੰਨਦੇ ਨੇ ਉਹ ਤਾਂ ਬੰਦੇ ਨਹੀਂ ਫਲ ਲੋਕ ਫਲ ਮੰਨਦੇ ਨੇ ਉਹ ਕਹਿੰਦੇ ਨੇ ਇਹਦਾ ਕੋਈ ਫਲ ਨਹੀਂ ਤਸਤੂਰ ਨੇ ਕਿਰਤ ਤੇ ਜਾ ਕੇ ਵੀ ਮਤ ਬਹਿਤੋ ਉਹੀ ਰਹੇ ਨੇ ਹੱਥ ਤਾਂ ਫਰਕ ਨਹੀਂ ਪਿਆ ਠੀਕ ਹੈ ਜੀ ਨਾ ਭੀਜੇ ਭੇਡ ਮਰੈ ਭੇਡ ਸੂਰ ਨਾ ਭੀਜੇ ਕੀਤੇ ਉਵੇਂ ਧੂੜ ਲੇਖਾ ਲਖੀਏ ਮੰਨ ਕੇ ਭਾਏ ਨਾਨਕ ਭੀਜੈ ਸਾਚੈ ਨਾਹੀਂ ਇਹ ਕਹਿੰਨਾ ਬੜੇ ਬੜੇ ਸੂਰਮੇ ਜੇ ਰਣ ਦੇ ਵਿੱਚ ਜੁੱਦ ਕੇ ਮਰ ਜਾਂਦੇ ਨੇ ਮੁਕਤ ਹੋ ਜਾਂਦੇ ਨੇ ਪਰਵਾਣੀ ਨਹੀਂ ਦੋਦੀਏ ਜਦੋਂ ਦੀ ਆਪ ਵੀ ਵਾਸਤੇ ਲੜ ਕੇ ਵਾਲੇ ਮੁਕਤੀ ਨਹੀਂ ਪ੍ਰਾਪਤ ਕਰਿਆ ਸਕਦੇ ਆਪੀ ਇੱਥੇ ਹੀ ਮਰੇ ਸੂਰ ਬੜੇ ਸੂਰਮੇ ਭੇਡ ਦੇ ਵਿੱਚ ਪੜ ਕੇ ਮਰ ਜਾਂਦੇ ਨੇ ਮੁਕਤੀ ਨਹੀਂ ਪ੍ਰਾਪਤ ਹੋਤੀ ਇਸ லாம் ਵਾਸਤੇ ਇਸ਼ਾਰਾ ਹੈ ਕਿ ਉਹ ਕਹਿੰਦੇ ਆ ਜਿਹੜਾ ਲੜੂਗਾ ਤੇ ਉਹ ਮੁਕਤ ਹੋ ਜਾਊਗਾ ਹਾਂਜੀ ਨਾ ਇਹ ਦੂਰੇ ਵੀ ਕਹਿੰਦੇ ਨੇ ਸਾਰੇ ਕਹਿੰਦੇ ਨੇ ਇਹ ਗੱਲ ਨੂੰ ਅੱਛਾ ਸਿਰਫ ਲੜਾਉਣ ਵਾਸਤੇ ਫੌਜਾਂ ਨੂੰ ਇਹ ਇਹ ਹਥਿਆਰ ਵਰਤਦੇ ਆਂ ਸਾਰੇ ਕਹਿੰਦੇ ਨੇ ਹੁਣ ਵੀ ਕਹਿੰਦੇ ਨੇ ਸ਼ਹੀਦ ਸਾਰੇ ਠੀਕ ਹੈ ਜੀ ਇੱਥੇ ਤਾਂ ਵੱਡੇ ਵੱਡੇ ਪੱਥਰ ਲਾ ਦਿੰਦੇ ਮਰੇ ਸੀਗੇ ਹਾਂਜੀ ਤਾਂ ਕਿਰਨੈ ਤੂੜ ਹੋ ਗਏ ਥੇ ਇੱਟੇ ਹੀ ਬਰਖਪ ਕੇ ਨਹੀਂ ਭਜਿਆ ਬੁਰ ਲੇਖਾ ਲਿਖੀਏ ਬੁਰ ਕੇ ਪਾਏ ਜਿੰਨਾ ਜਰ ਮਨ ਤੇ ਭੌਦਾ ਲੇਖਾ ਲਿਖਦੇ ਆ ਜਿੰਨਾ ਜਰ ਬੁਰ ਤੇ ਕਹਿਣੇ ਚੱਲਦੇ ਆ ਉਹ ਕਬ ਕੀਏ ਮਨ ਜਿੰਨਾ ਚ ਪ੍ਰਧਾਨ ਕੀਆ ਸਾਡੀ ਪ੍ਰਧਾਨਗੀ ਚ ਜੀਵਨ ਬਕੀਤ ਹੋ ਰਿਹਾ ਲੇਖਾ ਲਿਖੀਏ ਬੁਰ ਕੇ ਪਾਏ ਨਾਨਕ ਭਿਜੇ ਸੱਚੇ ਨੋਏ ਕਿਉਂ ਨਹੀਂ ਭਿਜਦੇ ਪਹਿਲਾਂ ਲੇਖਾ ਲਿਖੀਐ ਮੁਰਕੇ ਪਾਏ ਕਿਉਂ ਕੁਝ ਕਰ ਰਹੇ ਨੇ ਮਨ ਆਪਣੇ ਮਨ ਦੀ ਇੱਛਾ ਪੂਰ ਕਰ ਰਹੇ ਨੇ ਦਰਗਾਹ ਕਿਉਂ ਦੀ ਕਿਹਾ ਹੋਇਆ ਵੀ ਤੁਸੀਂ ਇਹ ਕੰਮ ਕਰੋ ਇਹ ਦਰਗਾਹ ਜੋ ਕਿਹਾ ਹਰ ਕਰੋ ਫਿਰ ਮਨ ਭਿਜਦਾ ਕਿ ਜੂ ਮੈਂ ਜੋ ਦਰਵਾਜੋ ਕਿਹਾ ਦਰਗਾਹ ਜੋ ਕੀ ਕਹੇ ਨਾਨਕ ਭਿਜੇ ਸੱਚੇ ਨੋਏ ਰਾਜਾ ਫਰਮਾਉਂਦੇ ਆ ਕਿ ਸੱਚੇ ਨਾਮ ਨਾਲ ਭਜੂਗਾ ਉਹ ਤਾਂ ਤੁਸੀਂ ਫਾਰਮੂਲਾ ਵਰਤੇ ਆ ਦੀ ਜਿਕੇ ਮੈਂ ਜਿਹਨੇ ਫਰਮਸਾਲਾ ਵਰਤ ਲਿਆ ਉਹਦਾ ਭਜਿਆ ਬਸ ਠੀਕ ਹੈ ਜੀ ਨਾ ਭੀਜੇ ਕੀਤੇ ਹੋਵੇਂ ਧੂੜ ਇਹ ਤੋਂ ਕੀ ਭਾਵ ਬਣਦਾ ਜੀ ਧੂੜ ਹੋ ਗਏ ਬੈਠੇ ਬੈਠੇ üttī ਹੋ ਗਏ ਕਹਿੰਦੇ ਵਰਪੀ ਆ ਨਮ ਕਥਿਓ ਘਾਹੀ ਇਹਨਾਂ ਦੀਆਂ ਕਹਾਣੀਆਂ ਬਣਾਈਆਂ ਹੋਈਆਂ ਨੇ ਅੱਛਾ ਜਿਵੇਂ ਵਾਲਮੀਕੀ ਬਾਰੇ ਕਹਿੰਦੇ ਆਹੋ ਠੀਕ ਹੈ ਜੀ ਵੀ ਸਮਾਧੀ ਦੇ ਵਿੱਚ ਉੱਪਰ ਪਤਾ ਨਹੀਂ ਲੱਗਿਆ ਢੂੜ ਜਾਂਮ ਕੀ ਹੈ ਹੋ ਗਿਆ ਉੱਥੇ ਠੀਕ ਹੈ ਜੀ ਅਸਲੀ ਗੱਲ ਹੈ ਕਿ ਲੇਖਾ ਲਿਖੀਏ ਮਨ ਕਹਿ ਭਾਏ ਨਾਨਕ ਭੀਜੈ ਸੱਚੈ ਨਾਹੀਂ ਜੇ ਬਣ ਕੇ ਪਾਇ ਲੈ ਗੱਲ ਕੀ ਅੱਥੀ ਵਿੱਚੂਗਾ ਨਾਮ ਨਾਲ ਵੇਚੂਗਾ ਤਾਂ ਤਕਰਾਂ ਨਹੀਂ ਛੇੜੇ ਬਹੁਤ ਲੋਕ ਸਿਮਰਨ ਕਰਦੇ ਆ 24 ਘੰਟੇ ਲੱਗੇ ਰਹਿਣੇ ਆ ਵਾਹਿਗੁਰੂ ਦਾ ਜਾਪ ਕਰਨ ਕਿ ਆ ਇਸ ਤਰ੍ਹਾਂ ਵੀ ਭਿੱਜਿਆ ਜਾ ਸਕਦਾ ਜੀ ਇਹ ਪ੍ਰਾਪਤੀ ਹੋ ਜAVE ਤਾਂ ਭਿੱਜ ਦਾ ਪਤਾ ਲੱਗ ਜੀ ਰੌਲਾ ਪਾਉਣਾ ਜਾਂ ਤੇ ਜਿੰਨਾ ਗੁਰਬਾਣੀ ਲੱਗਦੀ ਉਹ ਭਿੱਜਿਆ ਦੱਸਣਾ ਤਾਂ ਸਹੀ ਕਿ ਮੈਂ ਲੋਕਾਂ ਨਾਲ ਭਉ ਦੇਣਾ ਠੀਕ ਹੈ ਹੁੰਦਾ ਉਹ ਨਾ ਪਾਉਂਦੇ ਜਾਂ ਪੁਜਾਰੀ ਪੁੱਛੜ ਪੁੱਛਿਆ ਪੂਰੀ ਪਰਿਭਲਾਏ ਜੇ ਤੇ ਜਾਨਾ ਉਹਦਾ ਪੂਰੀ ਭਲਾ ਕਹੇ ਜਾਂਦੀ ਮੈਂ ਦੱਸਾਂ ਪੁੱਛਿਆ ਪੁਜਾਰੀ ਕਿਸਾ ਦਾ ਝੂਠ ਬੋਲੇ ਜਾਂਦਾ ਨਾ ਮਰਜੀ ਝੂਠ ਦੇ ਸਰਤੇ ਰੋਟੀ ਵੀ ਝੂਠਾ ਮਾਇਆ ਮਾਇਆ ਕੋ ਮਾਇਆ ਬੜੇ ਘੜ ਘੜ ਲੱਭੇ ਨੂੰ ਝੂਠ ਮਿਲਦਾ ਦੂਰ ਆਦਮ ਨਾ ਹਾਂਜੀ ਮਹੱਲਾ ਪਹਿਲਾ ਨਵ ਛੇ ਖਟਕਾ ਕਰੇ ਵਿਚਾਰ ਨਿਸ਼ ਦਿਨ ਉਚਰੇ ਭਾਰ ਅਠਾਰ ਤਿਨ ਭੀ ਅੰਤ ਨਾ ਪਾਇਆ ਤੋਹੇ ਨਾਮ ਵਿਹੂਣ ਮੁਕਤੀ ਕਿਉ ਹੋਏ ਨੌ ਤਾਂ ਦੁਆਰੇ ਦੇ ਛੇ ਚਾਰ ਸੰਦੇ ਇਹਨਾਂ ਦੇ ਵਿਚਾਰ ਤਾਂ ਗ੍ਰੰਥਾਂ ਦਾ ਕਰਨਾ ਨੌ ਕਿਸੇ ਕਹਿੰਦੇ ਵੀ ਨੌ ਇਹਨਾਂ ਦੀਆਂ ਗ੍ਰਾਮਰ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਬਿਆਕਰਣ ਦੀਆਂ ਨੋ ਨੋ ਨਵ 6 6 ਦਰਸ਼ਨ ਖੜ ਦਰਸ਼ਨ ਵੀ ਨੇ ਖੜ ਖੜ ਤੁੜਾ ਕਰੇ ਵਿਚਾਰ ਇਹਨਾਂ ਖਦਾ ਬੰਦ ਵਿਚਾਰ ਕਰੀਏ ਪੜੀ ਜਾਂਦੇ ਵਿਚਾਰੀ ਜਾਂਦੇ ਨਹੀਂ ਨਵ 6 ਕੀ ਹੋ ਗਿਆ 9 6 15 ਤਾਂ ਨਹੀਂ ਨਵ ਦਾਰ ਦਾ ਮਤਲਬ ਹੈ ਬਾਹਲੇ ਜੀ ਜੁੜਿਆ ਆਇਆ 10 10 ਦਾ ਜਗਰ ਨਹੀਂ ਲਿਆਉਂਦਾ ਵਿੱਚ ਅੱਛਾ ਜੀ ਨਵ 6 ਦਾ ਮਤਲਬ ਆ ਮਾਇਆ ਨਾਲ ਜੁੜ ਕੇ ਆ ਦਸ ਦਾਰ ਤਾਂ ਨਹੀਂ ਜਾਂਦਾ ਹੈ ਆਏ ਆਲੇ ਸਰੀਰ ਤੱਕ ਅਸੀਮਤਾ ਜਿਹੜੀ ਕਿਸੇ ਬਗੜੇ ਠਾਣੋ ਨਹੀਂ ਦਿੱਸੇ ਨਵਛੇ ਖਟਕਾ ਕਰੇ ਵਿਚਾਰ ਯਾਰ ਮਾਇਆ ਦਾ ਕਰਦਾ ਮਾਇਆ ਦਾ ਕਰਦਾ ਨਵਛੇ ਖਟਕਾ ਕਰੇ ਵਿਚਾਰ ਖਟ ਦਾ ਕੀ ਭਾਵ ਹੁੰਦਾ ਜੀ ਖਟ ਛੇ ਹੁੰਦਾ ਪਹਿਲਾਂ ਛੇ ਕਿਉਂ ਆਇਆ ਨਵ ਦੇ ਨਾਲ ਵੀ ਛੇ ਕਿਉਂ ਆਇਆ ਨਵਛੇ ਖਟਕਾ ਕਰੇ ਵਿਚਾਰ ਉਹ ਖੜ ਦਾ ਛੜਲੇ ਛੇ ਗਿਆਨੀ ਤਰੇ ਨੇ ਹੈ ਨਾਲ ਵਿਚਾਰ ਕਰ ਵੀ ਕਰੂਗਾ ਅੱਖਾਂ ਵੀ ਨੇ ਕੱਲ ਨੱਕ ਵੀ ਹੈ ਕਿਆ ਤੁਸੀਂ ਇਹਦਾ ਜਾਹੀ ਦਾ ਵਿਚਾਰ ਕਰ ਲੂ ਝੜਦਾ ਛੇ ਘਰ ਛੇ ਗੁਰ ਛੇ ਉਪਦੇਸ਼ ਇਹ ਲਾਏ ਹੋਏ ਨੇ ਉਹ ਛਾਤਰਾ ਨੇ ਵਿਚਾਰ ਠੀਕ ਹੈ ਖੱਟ ਦਾ ਭਾਵ ਵੀ 6 ਹੈ ਜੀ 6 ਨਵ 6 ਕੌਣ ਹੈ ਪਹਿਲਾਂ ਵਿਚਾਰ ਕਰਨ ਵਾਲੇ ਵੀ 6 ਨੇ ਅੱਛਾ ਜੀ ਸਰ ਜੁਲਦੀ ਛੇ ਨੇ ਠੀਕ ਹੈ ਗ੍ਰੰਥ ਨੇ ਛੇ ਉਹ ਤਾਂ ਗ੍ਰੰਥ ਨੇ ਛੇ ਗ੍ਰੰਥਾ ਨਹੀਂ ਵਿਚਾਰ ਕਰਦਾ ਇਸ ਲੈਵਲ ਤੇ ਮਾਇਆ ਦੇ ਲੈਵਲ ਤੇ ਕਰਦਾ ਕਹਿਣਾ ਮਤਲਬ ਮਾਇਆ ਤੋਂ ਗਾਹ ਨਹੀਂ ਹੱਦ अच्छा जी। نس دن ਉਚਰੇ ਪਾਰ 18। ਜਦੋਂ ਉਚਰੇ ਪਾਰ 18 18 ਪਾਰ ਦੀ ਗੱਲ ਕਰਦਾ ਬਾਇਆ ਨੇ। 18 ਪਾਰ ਆ ਜੀ ਬਨਸਪਤੀ ਦਾ ਇਹ ਪਤਾ ਤੋੜ ਲਓ 18 ਪਾਰ ਹੋ ਜਾਂਦੇ। ਗੱਲ ਤਾਂ ਬਾਇਆ ਦੀ ਹੋ ਕੀਤੀ ਫੇ ਹੋ ਸਕੋਗੀ ਤੇਰੀ। ਠੀਕ ਹੈ ਜੀ। ਤਿੰਨ ਵੀ ਅੰਤ ਨਾ ਪਾਇਆ ਤੋਹੇ ਨਾਮ ਵਿਹੂਣ ਮੁਕਤੀ ਕਿਉ ਹੋਏ? ਆ ਜਿਹੜੇ ਦੀ ਗੱਲ ਕਰਨ ਵਾਲੇ ਨੇ ਇਹਨਾਂ ਨੇ ਵੀ ਤੇਰਾ ਘਟ ਹੀ ਪਾਇਆ। ਸਾਰੇ ਘਰ ਸਤਿਵੰਤੇ ਨਹੀਂ ਕਰ ਸਕਿਆ ਕਿਸੇ ਨੇ ਫੋਲੇ ਖਣਾ ਲੈ ਕਿਸੇ ਨੇ ਬੜੇ ਬਣਾ ਲੈ ਸੁਕਤਲ ਦੇ ਵਿੱਚ ਵੀ ਉਹਨਾਂ ਦੇ ਪੱਤੇ ਕੌਣ ਤੋੜੂਗਾ ਹਲੇ ਕਿਹੜਾ ਹੋਰ ਤਸਤੀ ਹੋਰ ਪਰੇ ਹੋਰ ਜਾ ਰਹੇ ਉਹਨਾਂ ਨੇ ਅੰਦਰ ਹੀ ਤੇਰਾ ਪਾਇਆ ਠੀਕ ਹੈ ਜੀ ਨਾਮ ਵਿਹੂਣ ਮੁਕਤੀ ਕਿਉ ਹੋਏ ਨਾਮ ਤੇ ਸਖਲਿਆਂ ਦੀ ਮੁਕਤੀ ਕਿੰਨ ਹੋਈ ਨਾਮ ਤੇ ਸਖਲਿਆਂ ਦੀ ਮੁਕਤੀ ਨਹੀਂ ਹੁੰਦਾ ਹਾਂ ਜੀ ਨਾਬ ਵਸਤ ਬ੍ਰਹਮੈ ਅੰਤ ਨ ਜਾਣਿਆ ਗੁਰਮੁਖੀ ਨਾਨਕ ਨਾਮ ਪਛਾਣਿਆ ਕਹਿੰਦਾ ਜੇ ਲਾਹ ਕਮਲ ਦੇ ਵਿੱਚ ਬਸਦਾ ਤਾਂ ਰੂਪੇ ਵੀ ਥੜੀ ਜਾਣਦੇ ਹੁੰਦੋ ਵਿਚਰ ਸਾਪੀ ਜਿ ਬਸਦੇ ਨੇ ਕਹਿੰਦੇ ੱੱਲੇ ਗੁੰਡ ਗਿਆ ਖੋਜ ਕਰਨ ਲੱਗਿਆ ਕਰੋੜਾਂ ਸਾਲ ਖੋਜ ਕਰਦਾ ਰਿਹਾ ਬੇਅੰਤ ਬੇਅੰਤ ਕਹਿ ਕੇ ਬਾਹਰ ਨਿਕਲਿਆ ਆਏ ਆਦੀ ਪਤਾ ਲੱਗਿਆ ਕਿ ਛੇਤੀ ਲਾਹ ਕਮਲ ਬਸਤੇ ਪਰ ਅੰਤ ਨੂੰ ਜਾਣਦੇ ਮਾਇਆ ਦੀ ਖੋਜ ਕਨੇ ਕਰੋੜਾਂ ਸਾਲ ਕੋਈ ਕਰ ਲਵੇ ਇੱਥੇ ਦੀ ਪਾਇਆ ਜਾ ਸਕਦਾ ਇਸ ਸਿਸਟਮ ਦਾ ਕੋਈ ਅੰਤਪਾਲਵੇ ਹੋਈ ਨਹੀਂ ਸਕਦਾ ਜਿੰਦੋਂ ਵਰਜੀ ਸਾਇੰਟਿਸਟ ਜੋਰ ਲਾ ਲੈਣ ਉਹ ਤੋਂ ਬੜਕ ਬੜ ਜਾਣਗੇ ਮਰੇ ਹੋਏ ਸਾਰੇ ਜਿੰਦਾਂ ਕੋਈ ਮਿਲਦਾ ਹੀ ਆਇਆ ਕਦੋਂ ਸਾਰੇ ਮਰ ਜਿਆ ਗੱਦੜੇ ਹਨ ਤਾਂ ਜਾਣਿਆ ਗੁਰਮੁਖ ਹੁਕਮ ਪਛਾਨ ਲਿਆ ਹੁਕਮ ਨਾਲ ਚੱਲਦਾ ਸਾਰਾ ਸਿਸਟਮ ਹੀ ਇਹ ਲੋੜ ਸੀ ਆਪਾਂ ਨੂੰ ਜਾਣਣ ਦੀ ਹੁਕਮ ਪਛਾਨ ਲਿਆ ਹੁਕਮ ਮੇਰਾ ਸੇ ਚੱਲਦਾ ਸਭ ਕੁਝ ਹਾਂ ਜੀ ਇੱਥੇ ਜਿਹੜਾ ਬ੍ਰਹਮੇ ਦੀ ਗੱਲ ਬ੍ਰਹਮਾ ਉਹਦੀ ਗੱਲ ਹੋ ਰਹੀ ਹੈ ਜੀ ਤਾਂ ਉਹ ਬ੍ਰਹਮਾ ਦਾ ਬੋਲ ਅੱਛਾ ਜੀ ਅਜਿਹੇ ਅਸੀਂ ਖੋਜ ਕਰਦੇ ਹਾਂ ਸਾਰੇ ਪ੍ਰਭੂ ਹੀ ਦੇ ਸਾਡੀ ਖੋਜ ਸਾਰੇ ਪ੍ਰਭੂ ਹੀ ਦੇ ਚਾਰ ਪੈਸੇ ਪ੍ਰਭੂ ਹੀ ਠੀਕ ਹੈ ਜੀ ਇਹ ਜਿਹੜੇ ਅਰਥ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਕੀਤੇ ਸ਼ਲੋਕ ਦੇ ਉਹ ਹੈ ਜੀ ਨਵ ਨੂੰ ਉਹ ਕਹਿੰਦੇ ਨੌ ਵਿਆਕਰਣ 6 ਨੂੰ ਲਿਖਦੇ 6 ਸ਼ਾਸਤਰ ਖਟ ਨੂੰ ਲਿਖਦੇ 6 ਵਿਦਾੰਗ ਤੇ ਭਾਰ 18 ਨੂੰ ਲਿਖਦੇ 18 ਪਰਵਾਂ ਵਾਲਾ ਮਹਾਭਾਰਤ ਗ੍ਰੰਥ ਵੀ ਇਸ ਤਰ੍ਹਾਂ ਹੀ ਇਹ ਜਿਹੜੇ ਮਤਬੇ ਇਹਦੇ ਨੇ ਵਿਦਵਾਨਾਂ ਦੇ ਅਖਰਾਂ ਬਾੜੇ ਉਹ ਆਪਾਂ ਨੂੰ ਲੈਣੀ ਨਹੀਂ ਚਾਹੀਦੀ ਕਿਉਂਕਿ ਇੱਕ ਹੋਰ ਸ਼ਬਦ ਵੀ ਹੈ 10 18 ਮੈਂ ਪਰੰਪਰੋ ਨਾਨਕ ਿਵ ਏਕ ਤਾਰਹਿ ਇਹ ਸ਼ਬਦ ਸ੍ਰੀ ਰਾਗ ਵਿੱਚ ਆ ਜਾਂਦਾ ਜੀ ਇੱਥੇ ਉਹ ਲਿਖ ਦਿੰਨੇ ਜੇ ਚਾਰ ਵੇਦ 6 ਸ਼ਾਸਤਰਾਂ ਤੇ 18 ਪੁਰਾਣ 10 18 ਨੂੰ ਇੱਥੇ 18 ਪੁਰਾਣ ਲਿਖਦੇ ਆ ਅੱਗੇ ਉਹ ਮਹਾਭਾਰਤ ਲਿਖ ਦਿੰਨੇ ਮਰਜ਼ੀ ਹੈ ਜੋ ਲਿਖਦੇ ਕਾਇਮ ਵੀ ਉਹਨਾਂ ਵੱਦੂ ਲਿਖੀ ਗਏ ਹੋ ਫਿਰ ਉਹ 18 ਨੇ ਵਿੱਚ ਹੈ ਕੀ ਇਹ ਤਾਂ ਝੂਠ ਹੈ ਸਾਰਾ ਹਾਂਜੀ ਅਸਲ ਗੱਲ ਤਾਂ ਉਹ ਮਾਇਆ ਦੀ ਹੋਈ ਹੈ ਕਹਿੰਦੇ ਤੇਵਾ ਅਸਲੂ ਇੱਕ ਧਾਰਤ ਦੀ ਗੱਲ ਕਰਦੇ ਨੇ ਮਾਇਆ ਦੀ ਠੀਕ ਹੈ ਜੀ ਪਰ ਇਹ ਜਿਹੜਾ 10 18 ਦੀ ਗੱਲ ਉਹ ਕਰਦੇ ਆ 10 ਨੂੰ ਚਾਰ ਵੇਦ ਤੇ 6 ਸ਼ਾਸਤਰਾਂ ਤੋੜ ਲੈਣੇ ਆ अठार मैं कहने ਉਹ 18 ਔਰ ਮੈਂ ਇਕੱਠਾ ਜੋੜ ਕੇ 18 ਪੁਰਾਣਾ ਵਿੱਚ ਇੱਥੇ 18 ਪੁਰਾਣ ਕਹਿੰਨੇ ਆ ਕਿਤੇ ਗ੍ਰੰਥ ਨੇ ਉਹ ਬਚਾਉਣਾ ਚਾਹੁੰਦੇ ਹੁਣ ਦੇ ਬਾਬਲ ਦੇ ਨੂੰ 18 ਪਰਮਾਂ ਵਾਲਾ ਤਾਂ ਕਿਤੇ 18 ਨੂੰ 18 ਪਰਮਾਂ ਵਾਲਾ ਮਹਾ ਭਾਰਤ ਕਹਿੰਨੇ ਆ ਕਿਤੇ 18 ਨੂੰ ਸ਼ਾਸਤਰ ਕਹਿ ਦਿੰਨੇ ਕਿ ਕਿਤੇ ਕਹਿ ਦਿੰਦੇ ਆ 18 ਮਹਾਭਾਰਤ ਵਾਲਾ ਗ੍ਰੰਥ ਠੀਕ ਹੈ ਜੀ ਅੱਗੇ ਚੱਲੀਏ ਜੀ ਆਪਾਂ ਕਿੱਥੇ ਜੋੜ ਫਟਾਉਂਦਾ ਉੱਥੇ ਬੋਲ ਦਿੰਦੇ ਰਹਿ ਜਾ ਹਾਂਜੀ ਨਾਭ ਬਸਤ ਬ੍ਰਹਮੈ ਇਹਦਾ ਕੀ ਭਾਵ ਬਣਦਾ ਜੀ ਨਾਭ ਕੀ ਹੈ ਜੀ ਨਾਭੀ ਦੇ ਵਿੱਚ ਜਦ ਗਰਭ ਚ ਸੀ ਜੋ ਥੱਲੇ ਉਤੋਂ ਰਸ ਖਿੱਚਦਾ ਸੀ ਉਹਦੇ ਦਾ ਘੰਡ ਵਿੱਚ ਨਿਵਾਸ ਹੈ ਉੱਥੋਂ ਖਿੱਚਦਾ ਰਸ ਫਿਰਦੇ ਜੀ ਚਨਾਬ ਦਾ ਮਤਲਬ ਇਹ ਕਹਿੰਦੇ ਆਂ ਵੀ ਜਿਹੜੀ ਕਮਲ ਦੀ ਉਹ ਨਾਲੀ ਹੈ ਨਾ ਨਾਲੀ ਤੇ ਕਿੱਥੋਂ ਹੀ ਰਾਸ ਆਊਗਾ ਬਾਹਦੇ ਪੇਟ ਚੋਂ ਤਾਂ ਸਪਲਾਈ ਚੱਲੂਗੀ ਠੀਕ ਹੈ ਪਰ ਇਹ ਕਮਲ ਦੀ ਨਾਭੀ ਕਹਿੰਦੇ ਆ ਜੀ ਇਹ ਬਾਹਰ ਕਮਲ ਦਾ ਫੁੱਲ ਹੈ ਭਾਈ ਪਹਿਲੇ ਦੇ ਜੜਾਂ ਦੇ ਵਿੱਚੋਂ ਰਾਸ ਆਉਂਦਾ ਕਮਲ ਨੂੰ ਜਾਂਦਾ ਉਹਦੇ ਨਾਲ ਕੰਪੈਰਸ਼ਨ ਕਰਦੇ ਨੇ ਕਰਵ ਦਾ আচ্ছা ਜੀ ਉਹ ਤਾਂ ਕੀਤਾ ਹੋਇਆ ਅਛਾ ਪਰ ਜਿਹੜਾ ਬਾਹਰ ਕਮਲ ਦਾ ਫੁੱਲ ਹੈ ਇਹਦੇ ਨਾਲ ਕੁਛ ਲੈਣਾ ਦੇਣਾ ਨਹੀਂ ਗੁਰਮਤ ਦਾ ਹੈ ਜੀ। ਉਹ ਪਹਿਲਾਂ ਤੋਂ ਹੀ ਜੀਤਾ ਹੋਇਆ ਹੈ ਹਿਰਦੇ ਰੋਧਦਾ। ਵਿਜਤੋਂ ਤੱਕ ਤ੍ਰਿਕੁਟੀ ਚ ਜੁੜਿਆ ਹੋਇਆ ਜਦ ਤੱਕ ਹੈ ਨਾ ਕਦੇ ਬ੍ਰਹਮੇ ਅੰਤ ਨਾ ਜਾਣਿਆ ਦਾ ਭਾਵ। ਜਿੰਨਾ ਜਿਹੜਾ ਗਰਵ ਚ ਬਸਦਾ ਰਹਿਆ ਨਾਵੀ ਦੇ ਵਿੱਚ ਬ੍ਰੰਭੇ ਦੇ ਕੁਛ ਵੀ ਨਹੀਂ ਜਾਣਿਆ। ਅੰਤ ਕੋ ਪਾਵਣ ਜੋਗ ਆਏ ਸੋ ਅੰਤ ਕਮਾਏ। ਇਹ ਮਾਇਆ ਦੀ ਖੋਜ ਪੈ ਗਿਆ। ਹਮੇ ਜਿਵੇਂ ਸਰਦਾਰ ਪਿਆ ਹੋਇਆ ਗਾਇਆ ਦੀ ਖੋਜ ਕਰੋੜਾਂ ਸਾਲ ਖੋਜ ਕਰਦਾ ਰਿਹਾ ਗਾਇਆ ਦੀ ਕੱਕਵਲੀ ਲੱਭਿਆ ਪਹੁੰਚ ਗਿਆ ਗਾਇਆ ਦੀ ਖੋਜ ਤੋਂ ਚੇਤਨ ਤੱਕ ਪਹੁੰਚਿਆ ਜਾ ਸਕਦਾ ਇਹ ਲਾਲਣ ਕਰੋੜਾਂ ਸਾਲ ਇਹ ਵੀ ਸਹਿਦਾਨ ਪਹਿਲਾਂ ਵੀ ਇਹ ਹੋ ਚੁੱਕਿਆ ਹੈ ਇਹ ਕਹਿੰਦੇ ਨੇ ਅਸੀਂ ਚੇਤਨ ਤੱਕ ਪਹੁੰਚਾਂਗੇ ਇਹ ਬੂਰਖਾ ਦੇ ਬੂਰਖੇ ਨੇ ਇਹਨਾਂ ਦੇ ਕਿਸੇ ਕਾਬੂ ਦੇ ਵਿੱਚ ਆ ਸਕਦਾ गुरुमुखी नानक नाम पहचाणियां ਵੀ ਗੁਰਮੁਖ ਹੋ ਕੇ ਹੀ ਨਾਮ ਪਛਾਣਿਆ ਜਾ ਸਕਦਾ ਹੈ ਜੀ ਗੁਰਮੁਖ ਨੇ ਹੁਕਮ ਬਿਠਾਣ ਲਿਆ ਉਹ ਤਹਿਤ ਦਾ ਹੁਕਮ ਨੇ ਹੋ ਰਿਹਾ ਸਭ ਕੁਝ ਤੁਸੀਂ ਧਾਪੀ ਦੇ ਵਿੱਚ ਦੇਖ ਲਿਓ ਵੀ ਉੱਥੇ ਵੀ ਸਭ ਕੁਝ ਹੋ ਰਿਹਾ ਹੈ ਹੋ ਰਿਹਾ ਹੁਕਮ ਨਾਲ ਸਭ ਕੁਝ ਠੀਕ ਹੈ ਜੀ ਬ੍ਰਹਮਾ ਬਤਜਾਰੇ ਠੀਕ ਹੈ ਜੀ ਪੋਡੀ ਆਪੇ ਆਪ ਨਿਰੰਜਨਾ ਜਿਨੇ ਆਪ ਉਪਾਇਆ ਆਪੇ ਖੇਲ ਰਚਾਇਓਨ ਸਭ ਜਗਤ ਸਬਾਇਆ ਆਪੇ ਆਪ ਰਚਣਾ ਤੁਝਣ ਆਪੇ ਜਿਹੜਾ ਜਿਹੜਾ ਹਸ ਆਪੇ ਰਚੜ ਆਪਣਾ ਨੂਰ ਪੈਦਾ ਕੀਤਾ ਅੱਛਾ ਆਪਣਾ ਨੂਰ ਪੈਦਾ ਕੀਤਾ ਨੂਰ ਆਇਆ ਜਿਹੜੇ ਵਾਸਤੇ ਬੱਲਾ ਨੂਰ ਉਪਾਇਆ ਨੂਰ ਚਿੱਤ ਨੂੰ ਕਹਿੰਦੇ ਆ ਜੀ ਨਾ ਨਾ ਚੇਤਨੂ ਨੂਰ ਦੂਰ ਤਾਂ ਬੋਲ। ਅੱਛਾ ਜੀ। ਪੈਦਾ ਜੋ ਹੋਇਆ ਬੋਲ ਪੈਦਾ ਹੋਇਆ। ਇਹ ਥੋੜੀ ਪੈਦਾ ਹੋਇਆ। ਰਾਤ ਬਾਦ ਜੋ ਕੁਝ ਪੈਦਾ ਨੂਰ ਹੈ ਹਾਂ ਜੀ? ਉਹ ਦੂਰ ਹੈ। ਬੜਾ ਦੂਰ ਹੈ। ਜਿਹੜਾ ਚਿੱਤ ਹੈ ਉਹ ਨਿਰੰਜਨ ਹੈ ਜੀ। ਉਹ ਠੀਕ ਹੈ। ਆਪੇ ਆਪ ਨਿਰੰਜਨਾ ਜਿਨੀ ਆਪ ਪਾਇਆ ਜਿਹੜਾ ਮਨ ਹੈ ਚਿੱਤ ਚੋਂ ਪੈਦਾ ਹੋਇਆ। ਆਹ। ਪਰ ਆਪੇ ਪੈਦਾ ਕੀਤਾ ਠੀਕ ਹੈ ਜੀ। ਤਾਂ ਹੀ ਤਾਂ ਜੇਤੂ ਕੀ ਤੈ ਮਿਲੀ ਜਿਸ ਤੋਂ ਹੋਈ ਇਹ ਚੀਜ਼ ਉੱਥੇ ਮਿਲਲੀਏ ਬਾਅਦ ਜੇ ਤੋਂ ਆਪੇ ਖੇਲ ਰਚਾਇਓਨ ਸਭ ਜਗਤ ਜਗਤ ਦਾ ਖੇਲ ਤ੍ਰੈ ਗੁਣ ਆਪ ਸਿਰਜਿਐਨ ਮਾਇਆ ਮੂਹ ਵਧਾਇਆ ਗੁਰ ਪ੍ਰਸਾਦੀ ਜਿਨ ਭਾਣਾ ਪਾਇਆ। ਤ੍ਰੈ ਗੁਣ ਆਪੇ ਸਿਰਜੇਨ ਤਾਂ। ਤ੍ਰੈ ਗੁਣ ਆਪੇ ਸਿਰਜੇਨ ਵਾਇਆ ਮੂਹ ਵਧਾਇਆ। ਆਯਾ ਦਾ ਮੁਦ ਅਲੇਪ ਆਪਣੇ ਅੰਦਰ ਆਪ ਸਿਰਜਣ ਜਿਤਨੇ ਸਿਰਜੇ ਆਇ ਇਹ ਤੇ ਕਿਹਨੂੰ ਹਾਂਜੀ ਹਾਂ ਇਹ ਨਹੀਂ ਦੱਸਿਆ ਇਹਦੇ ਅੰਦਰ ਲੋ ਪੈਦਾ ਹੋਇਆ ਹੈ ਹੋਇਆ ਪੈਦਾ ਹੋਈ ਔਲਾਦ ਹੋਵੇ ਦੀ ਛਾਹ ਜਾਂ ਬਲਾਦ ਨੂੰ ਪਾਣਾ ਇਹਦੇ ਅੰਦਰ ਇੱਛਾ ਪੈਦਾ ਹੋਈ ਹੈ ਨਹੀਂ ਮਨ ਚ ਹੋਈ ਹੈ ਕਿ ਚਿੱਤ ਚ ਹੋਈ ਹੈ ਚਿੱਤ ਚ ਸਿਰਜਣ ਲਿਖਿਆ ਤ੍ਰੈ ਗੁਣ ਆਪ ਸਿਰਜਣ ਇਹ ਸਿਰਜਣ ਹਾਰਾ ਵੀ ਹੈ ਰਚਨਾਰ ਹੋਈ ਹੈ ਰਚਨਾਰ ਮੂਤਾਂ ਸਚਨਾਰ ਕਿੱਥੇ ਆਵਾ ਅੱਛਾ ਜੀ ਸਚਨਾਰ ਆ ਗਿਆ ਆਪਣਾ ਰਚਨਾਰ ਠੀਕ ਹੈ ਤੇ ਮਾਇਆ ਮੋਹ ਵਿਧਾਇਆ ਕੌਣ ਹੈ ਜੀ ਫਿਰ ਇਹ ਮਨ ਇਹ ਹੁਣ ਇੱਥੇ ਮਨ ਦੀ ਗੱਲ ਆ ਰਹੀ ਹੈ ਆਪਣੇ ਮੋਹ ਵਧਾਇਆ ਲੈ ਉਹ ਪਾਣਰ ਤੇ ਕਿਤੇ ਦੂਰੇ ਆਪਣੇ ਮਾਹੋਕ ਦਾ ਅੱਛਾ ਜੀ ਜੀਵ ਦੀ ਗੱਲ ਹੋ ਰਹੀ ਹੈ ਜੀ ਜੀਵ ਨੇ ਮੋਹ ਵਧਾ ਲਿਆ ਆਪਣੇ ਅੰਦਰ ਠੀਕ ਹੈ ਤਾਂ ਤ੍ਰੈ ਗੁਣ ਕੀ ਕੀ ਹੈ ਸਾਹਿਬਾ ਮਾਇਆ ਦੇ ਰੇਲ ਨੂੰ ਮਸਲਦਾ ਹੋ। ਅੱਛਾ ਜੀ। ਗੁਰਪ੍ਰਸਾਦ ਦੀ ਉੱबरे ਜਿਨ ਪਾਣਾ ਨਾਲ ਜਿਨ ਪਾਣਾ ਪਾਇਆ ਜਿਨ ਪਾਣਾ ਚੱਗ ਲਾ ਗਿਆ। ਗੁਰਕਾ ਪਾਣਾ। ਠੀਕ ਹੈ ਜੀ। ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ। ਨਾਨਕ ਕਹਿੰਦਾ ਸੱਚੇ ਵਰਤਦਾ ਸਾਰੇ ਝੂਠ ਦਾ ਨਾਸ ਬੰਤਾ। ਸਭ ਸੱਚ ਜਿ ਸਮਾਇਆ ਸਭ ਕੋ ਸੱਚ ਵਿੱਚ ਸਮਾ ਰਿਹਾ ਹੈ ਜੋ ਕੋ ਚ ਅਜ ਤੱਕ ਸਮਾਇਆ ਸੱਚ ਇਸ ਸਮਾਇਆ ਇੱਥੇ ਪਹਿਲੀ ਪੌੜੀ ਦੀ ਸਮਾਪਤੀ ਹੈ ਜੀ ਹਾਂ ਜੀ